ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਗਿਆਨ ਅੰਜਨ ਗੁਰ ਦੀਆ ਵਿੱਚ ਆਪਣੀ ਗੱਲ ਕਰਦੇ ਹੋ ਗਿਆ ਆਪਣੀ ਗੱਲ ਅਕਸਰ ਹੀ ਆਵੀ ਤੈਹੀ ਕਹਿੰਦੀ ਗਿਆਨ ਦਾ ਹੋਣਾ ਉਸ ਤੇ ਨਾਮ ਤੇ ਸ਼ੁਰੂ ਕਰੀਏ ਗੱਲ ਜਾਣ ਤੇ ਆ ਕੇ ਮਗਾਰਤੀ ਗੱਲ ਜਾਣ त्याग ਦੁਬਾਰਾ ਸ਼ੁਰੂ ਕਰਦੀ ਗੱਲ ਨਾਮ ਕੀ ਹੁੰਦਾ ਨਾਮ ਤੋਂ ਸ਼ੁਰੂ ਕੀਤੀ ਹੈ ਗੱਲ ਸੁਖੁਧੀ ਸੋਖਾਂ ਪਰ ਪ੍ਰਭ ਨਾਮ ਬੋਲਦੇ ਆਂ ਕੇ ਬੋਲੂ ਸੋ ਭਗਤ ਜਨਾ ਦਾ ਜੋ ਬੋਲਤੇ ਕੇ ਨਾਮ ਨਾਲ ਲੱਗੇ ਹੋਰ ਕਿਸਦਾ ਬੋਲਤੇ ਕੇ ਨਾਮ ਸਦਾ ਕੇ ਨਾ ਲੈਣਾ ਕੋਣ ਲੈਦਾ ਸਾਰੀ ਗੁੱਸ ਦੇਣਾ ਪਰ ਨਾਮ ਬਾਰੇ ਦੀ ਪਤਾ ਤਾਂ ਕਿਹਾ ਜਾ ਨਾਮ ਤੇ ਜਾਇ ਕੋ ਦੋੜ ਨਾਮ ਨਾ ਹੋਰੇ ਕੋ ਦੋੜ ਜੋ ਸਮਝ ਆਇਆ ਨਾਮ ਬਾਰੇ ਉਹੀ ਤੋੜਦੇ ਨੇ ਸੋ ਚਾਨ ਨਹੀਂ ਹਾਸਲ ਕਰਦੇ ਲੋਕਾਰੇ ਪਹਿਲਾਂ ਜੀ ਤੋੜਣਾ ਨਾਮ ਕੀ ਹੁੰਦਾ ਉਹ ਕੜੀ ਦੁਆਇਆ ਦਾਉ ਰੂਪੀ ਜਿਹਦਾਂ ਸਾਰੇ ਰੋਗ ਦੂਰ ਹੋ ਜਾਣਗੇ ਉਹਦੇ ਬਾਰੇ ਇਹ ਗੱਲ ਖਵਾਇਆ ਫਰਮਾਤਾ ਦਾਹਣਾ ਵੀ ਸਾਡੇ ਕੋਲ ਦੋਈ ਠੀਕ ਹੈ ਉਹ ਕਹਿੰਦਾ ਕਿ ਉਹ ਫੀਰ ਉਹ ਕਹਿੰਦਾ ਸਾਡੇ ਕੋਲ ਇੰਨਾ ਮਤਲਬ ਹੈ ਬਿਮਾਰੀ ਜਿਹੜੀ ਦੇਖਦੀ ਹੋ ਗਈ ਤੇ ਕਹਿੰਦਾ ਸਾਡੀ ਜਲਦੀਆਂ ਨੇ ਤੇਰੇ ਸਾਹਨੇ ਉੱਤੇ ਹਰ ਇੱਕ ਧਰਮ ਦੇ अपने बनाए ਬਣਾਏ ਹੋਏ ਨੇ ਪਤਾ अपने ਆਪਣੇ ਆਪਣੇ ਦੇ लो, ਗਾ ਲੋ लो, ਗਾ ਲੋ ਬਣਾਇਆ ਤਾਂ ਤਾਂ ਵੀ ਇਕੱਠੇ ਹੋ ਕੇ ਬਾਈ ਡਿਸਕਸ ਕਰ ਜੇ ਉਹ ਕੰਮ ਛੱਡ ਦਿੱਤਾ ਆਪਣੇ ਆਪਣੇ ਨਸੰਦਰ ਨੂੰ ਵਜਾਉਣ ਦੇ ਲੱਗੇ ਆਪਣੇ ਆਪਣੇ ਬੰਦੇ ਹੁੰਦੇ ਨੇ ਉੱਥੇ ਰੋਟੀ ਪਾਣੀ ਨੰਦਰ ਪਾਣੀ ਝੋਹਾਂਦੇ ਨੇ ਮੁੜ ਫਿਰ ਤਾਂ ਤੁਸੀਂ ਜਿਹੜੇ ਡਿਫਰੈਂਸਿਸ ਨੇ ਉਹਨੂੰ ਬੁਫਾਉਂਦੇ ਵੀ ਜਾਏ ਉਹਨੂੰ ਪੱਕੇ ਕਰਨ ਵਾਸਤੇ ਇਹ ਡੇਰੇ ਬਣਾਏ ਇਹ ਵੀ ਤਾਂ ਹੈ ਡਿਫਰੈਂਸ ਕੋਈ ਜਲਦੀ ਜਲਦੀ ਦੁਨੀਆਂ 'ਤੇ ਕੋਈ ਖੋਜ ਨਹੀਂ ਹੈ ਜੁਦੀ ਅੱਜ ਤੱਕ ਇਸ ਗਿਆਨ ਦੀ ਕੋਈ ਖੋਜ ਨਹੀਂ ਕਿਥੇ ਗਿਆਨवान ਆਦਮੀ ਖੋਜੀ ਇਕੱਠੇ ਹੋ ਕੇ ਬੈਠੇ ਚਲ ਰਾਤੀ ਹੋਵੇ ਜਦੋਂ ਸੰਸੋਬੇ ਤੋਂ ਹੋਏ ਬਹੁਤ ਜਿਆਦਾ ਇਕੱਠੇ ਹੋ ਜਾਂਦੇ ਨੇ ਪਰ ਇਹ ਨਹੀਂ ਹੁੰਦੇ ਜਲ ਕੇ ਇਹਨਾਂ ਨੂੰ ਹੋਣਾ ਚਾਹੀਦਾ ਹੋਰ ਕੋਈ ਹੋਵੇ ਨਾ ਦੁਨੀਆਂ ਦੇ ਵਿੱਚ ਤਾਂ ਪ੍ਰੈਕਟੀਕਲ ਹੈ ਸਭ ਨੇ ਮਾਇਆ ਦੇ ਵਿੱਚ ਇਤਨ ਕੁਝ ਹੈ ਨਹੀਂ ਦੇਖ ਲੂਆ ਬਹਿ ਹੌਣ ਨੂੰ ਇਸ ਸਰਕਾਰ ਛੱਡੀ ਧਰਮ ਚਲਦੀ ਹੈ ਤੂੰ ਵਸੇ ਡੱਗੀ ਚੱਲ ਤੂੰ ਬਾਹਰ ਤਾਂ ਦੇਣਾ ਪੈਣਾ ਥੁਰ ਬਣਾ ਕੇ ਉਹ ਕਹਿੰਦੀ ਖੋਜ ਕਰੂਗਾ ਤਾਂ ਉਹ ਮਰਣਾ ਭੂ ਕੋਈ ਬਾਹਰ ਕੱਢ ਜਾਉਣਾ ਜਦ ਉਹਦਾ ਮੁੱਲ ਪੈਣਾ ਜਿੱਤੇ ਬਾਹਰੋਂ ਕੁਝ ਆਉਣਾ ਨਹੀਂ ਬੋਲ ਪੈਣਾ ਨਹੀਂ ਲੋਕਾਂ ਨੂੰ ਬੇਵਕੂਫ ਬਣਾਉਣਾ ਬਣਾ ਰੱਖਾਂ ਕਿ ਜਲਾ ਕੇ ਖੋਰਾਂ ਨੂੰ ਖੋਰਾਂ ਵੀ ਜੋਰ ਖੋਰਾਂ ਆਪਣਾ ਮਗਲ ਲੱਗ ਉਸ ਜਿਹੜੇ ਮੁੱਦੇ ਖਾਸ ਤੀਰ ਤੋਂ ਪਾਉਂਦੇ ਮੁੱਦਾ ਵੀ ਗਾਇਬ ਕਰਤਾ ਪਰ ਅਦੇ ਵਿੱਚ ਇਕਤਾ ਦਾ ਰੋਲ ਲੱਗੇ ਤੇ ਦੇਖ ਤਾਂ ਅਨੇਕਤਾ ਵਿੱਚ ਇਕਤਾ ਕਿਵੇਂ ਹੋ ਜੂਗੀ ਇਕਤਾ ਅਨੇਕਤਾ ਪੈਦਾ ਹੁੰਦੀ ਆ ਅਨੇਕਤਾ ਜੋ ਕਦੇ ਇਕਤਾ ਪੈਦਾ ਹੋਈ ਹੋਈ ਨਹੀਂ ਅਨੇਕਤਾ ਨੂੰ ਇਕਤਾ ਵਿੱਚ ਜ਼ਬਰਦਸਤੀ ਸਮਝਾ-ਵਜਾ ਕੇ ਇਹ ਤਾਂ ਕਰਾਈ ਦੀ ਹੁੰਦੀ ਹੈ ਇਕਤਾ एकता ਯਾਰ ਕਸਨੀ ਬੰਦੀ ਹੈ ਜਦ ਇਕਤਾ ਹੋ ਜਾ ਫਿਰ ਦੂਈ ਨਹੀਂ ਹੁੰਦੀ ਜੇ ਇਕਤਾ ਹੋ ਜਬੇ ਤਾਂ ਦੂਈ ਨਹੀਂ ਰਹਿੰਦੀ ਜਿੰਨਾ ਕਿ ਦੂਈ ਹੈਗੀ ਇਕਤਾ ਨਹੀਂ ਹੁੰਦੀ ਸਾਤਰਾ ਵਿਦਵਾਨਾਂ ਦਾ ਕਾਉਂਸਲ ਸਾਡੇ ਜੀ ਇੱਕ ਦਾ ਵਿਚ ਹੈ ਨਹਿਰ ਦਾ ਹਰ ਰੂਪਾ ਕਹਦਾ ਸੀ ਅਜਾ ਤੋਣ ਅਸੀਂ ਅਸ਼ਾਂਤੀ ਦਾ ਰੂਪ ਬਣ ਚ ਸ਼ਾਂਤੀ ਕਹਦੇ ਫਿਰ ਹਿਆਣੇ ਵਾਲੇ ਕੋ ਅਜੀਬਿਤ ਆਪਣ ਇਹਨਾਂ ਤਾਂ ਖੁਸ਼ੀ ਮੈਂ ਕਹਿੰਦਾ ਵੱਖਰੀ ਹੈ ਅਸ਼ਾਂਤੀ ਕਹਦੇ ਤੁਹਾਡਾ ਦਾ ਘਰ ਇੱਕ ਆ ਉਹ ਤਾਂ ਦੇਖਦਾ ਇੱਥੇ ਤਾਂ ਦੇਖਦਾ ਵੀ ਹੈ ਦੀ एकता वच अनेकता एक पैदा हो रही है तासु पे रहे है एकता पर गणतंत्र भंग हो रही है विस्फोटक सिक्का निकल कर है रहे को है कोई नहीं कह रहे तकनीकी रहे है स्पोर्ट वाले जा रहे हैं बधे ਕਾਹਦੇ ਆਨਾਂ ਦੀ ਗੱਲ ਨਾ ਉਹਦੇ ਵੀ ਕਹਲਤੀ ਐ ਇਹਦਾ ਰੱਟ ਕੀ ਹੋਊ ਜੇ ਹੁਣ ਤੈਨੂੰ ਸੋਚਿਆ ਵਿਸਰਟ ਹੋ ਜੂਗਾ ਜਦ ਬਲਾਮ ਹੋਇਆ ਸੀ ਦੋਸਤਾਂ ਦੇ ਹੀ ਕੋਸੀ ਸੋਟੀਆਂ ਦੇ ਆਸਤਾਂ ਬਲਾਉਂ ਹੋ ਗਿਆ ਸੀ ਉਧਰ ਜਾ ਰਿਹਾ ਹੌਲੀ ਹੌਲੀ ਵੱਧਾ ਗਿਆਨ ਅੰਜਨ ਦੋਦੀਆ ਗਿਆਨ ਤੋਂ ਦਾ ਖਲਾਫ ਨਾ ਜੇ ਕੋਈ ਦਵੇ કે જાંતર ખલાવને જ્ઞાન એકતા કરાઉગા જ્ઞાન અંજન ગુરુ દિયા અજ્ઞાન અંધેર વિના સાને સાડી એકતા હોઈયા કે જતના અંદર લે એકતા દી ઉndi અપણે અંદર એકતા દી ઉndi બહાર ઉndi હોઈ જઈ પેરો તો વાના તે થાડા એકતા ਸਾਡਾ ਮਨ ਇਹ ਨੀ ਭਰੋਸਾ ਕਰ ਰਿਹਾ ਕਿਸੇ ਦੂਜੇ ਤੇ ਸੱਚ ਤੇ ਨਹੀਂ ਭਰੋਸਾ ਕਰ ਰਹਾ ਬੋਲ ਕੋਲ ਯਾਰ ਹੈ ਕਿ ਤ ਸੱਚਿਆਰ ਅੰਤਰਾਤਮਾ ਤੇ ਭਰੋਸਾ ਨਹੀਂ ਕਰ ਰਹਾ ਸੀ ਆਪਣੇ ਆਤਮਾ ਤੇ ਭਰੋਸਾ ਨਹੀਂ ਕਰ ਰਹਾ ਆਪਣੇ ਅੰਤਰਾਤਮਾ ਨੂੰ ਸਾਨੂੰ ਲੱਗਦੀ ਹੈ ਸਾਡੇ ਫਾਇਦੇ ਚ ਨਹੀਂ ਹੈ ਬਹੁਤ ਖਤਰਨਾਕ ਤੇਜ ਹੈ ਜਦੋਂ ਅੰਤਰਾਤਮਾ ਦੀ ਆਵਾਜ਼ ਸਾਨੂੰ ਆਪਣੇ ਨੁਕਸਾਨ ਤੇ ਲੱਗਾਂਗਾ ਕਿਵੇਂ ਆ ਗਦੋ ਬਿਨਾਵਿਛਾਲਾ ਬ੍ਰਹਿਤ ਬੁੱਧੀ ਹੋਗੀ ਇਹ ਹੀ ਤਾਂ ਬ੍ਰਹਿਤ ਬੁੱਧੀ ਬਿਨਾਸ਼ ਖਾਲਾ ਹੋਰ ਕੁਛ है ਹੈ ਆਹ ਹੋਰ ਕੋਈ ਦੱਸੇ ਕਿ ਕੀ ਹੁੰਦਾ ਬਿਨਾਸ਼ ਖਾਲਾ ਬ੍ਰਹਿਤ ਬੁੱਧੀ ਚਲੋ ਅੰਤਰਾਦਵਾ ਆਪਣੀ ਅੰਤਰਾਪੂਰਵਾਹੀ ਆਹੀ ਆਪਣੂ ਚੰਗੀ ਨਾਲ ਕੇ ਉਹ ਬਿਨਾਸ਼ ਖਾਲਾ ਹੈ ਬ੍ਰਹਿਤ ਬੁੱਧੀ ਹੋਗੀ ਓਏ ਆਪ ਅੰਦਰ ਬੈਠਾ ਦਸਲੂਰਾ ਓਦੀ ਤੁਸੀਂ ਗੱਲ ਕੌੜੀ ਕਿਲਾਈਆ ਤੂੰ ਇਹਦਾ ਪਰਮੇਸ਼ਰ ਦੀ ਗੱਲ ਨਹੀਂ ਬੰਦ ਰਿਹਾ ਕੋਈ ਤਰਾ ਤੂੰ ਹੀ ਗੱਲ ਨਹੀਂ ਬੰਦ ਰਿਹਾ ਸੱਚੇ ਵਾਇ ਨਹੀਂ ਸੁਣ ਰਿਹਾ ਇਹ ਤੋਂ ਬਾਹਰ ਕੋਈ ਨਹੀਂ ਹੁੰਦਾ ਇਹ ਨਿਮਾਸ਼ ਕਾਲ ਕਰਦੇ ਖੁੱਡੀ ਇਹ ਜਦੋਂ ਜਾਗਣਾ ਜਾਗ ਇਸ ਵਕਤ ਤੀ ਜਾਗਣਾ ਜਾਗ ਰੂਪ ਹੁੰਦਾ ਨਾ ਜੇਲਾ ਐਸੇ ਰਾਹ ਚੱਲਦਾ ਨਾ ਉਤਰਾ ਤੋਂ ਦਿਵਾਰ ਟਕਰਾ ਉਹਦਾ ਹੀ ਤਾਂ ਜੱਬੜ ਫੋਲਣਾ ਉਹਦੀ ਮੌਤ ਤਾਂ ਦੁਗਤੀ ਮੌਤੇ ਨਹੀਂ ਬਚਾਏ ਐਸੇ ਜੋ ਬਚਾ ਸੱਚ ਨਾਲ ਜੁੜਨ ਚ ਬਚਾਏ ਸੱਚ ਭਰੋਸਾ ਕੋਈ ਨਹੀਂ ਕਰ ਸੱਚ ਤਾਂ ਦਾ ਨੇ ਪਰ ਦੀ ਗੱਲ ਛੱਡੋ ਸੱਚ ਤਾਂ ਤਾਂ ਭੈ ਲੱਗਦੀ ਐ ਵੀ ਖਾਜੀ ਸਾਨੂੰ ਸੱਚ ਬਹੁਤ ਮਾੜੀ ਮਾੜੇ ਕਰਮ ਦੀ ਦੀ ਹੈ ਸੱਚ ਤੋਂ ਦਲਣਾ ਬਹੁਤ ਮਾੜੇ ਕਰਮੋਰੀ ਨਹੀਂ ਹਾਂਦੀ ਆ ਇਹ ਤਾਂ ਪਹਿਲੀ ਬੁੱਧੀ ਹੋਣੀ ਕੋਈ ਜਿਹੜਾ ਸੱਚ ਤੋਂ ਦਲਦਾ ਉਠੀ ਬੁੱਧੀ ਹੈ ਦਰਕਤ ਨੂੰ ਜਾ ਗਿਆ ਗਿਆਨ ਵਾਲਾ ਦਰਕਤ ਦੇ ਦੱਸੇ ਵੱਟ ਰਹਿ ਗਈ ਹਾਂਜੀ ਗਿਆਨ ਜੱਜਨ ਗੁਰਦਿਆ ਉਹ ਕਹਿੰਦੇ ਸਾਡੂੰ ਗਿਆਨ ਅੰਚਨ ਅੱਖ ਦੇ ਵਿੱਚ ਸਾਡੀ ਅਕਲ ਦੇ ਵਿੱਚ ਗਿਆਨ ਦਾ ਸਰਮਾ ਪਾ ਦਿੰਦਾ ਜੱਜਨ ਜਿੱਦਾਂ ਨੂੰ ਕਹਿੰਦਾ ਜਿਹੜਾ ਗੁਰਮਾਨਾ ਗਿਆਨ ਹੈ ਗਿਆਨ ਅਜਨ ਹੈ ਇਹਦੇ ਜਮਾਇਆ ਵੀ ਬਹੁਤ ਹੈ ਲੋਕ ਬੂਨਾ ਬੋਲਿਆ ਜਾਂਦਾ ਅਜਨ ਅਚਲ ਸਰਮੈ ਨੂੰ ਕਹਿੰਦੇ ਨੇ ਅਚਲ ਮਾਇਆ ਰੂਪ ਹੈ ਇਸ ਕਰਕੇ ਗਿਆਨ ਨੂੰ ਜਦੋਂ ਮੰਨਿਆ ਹੋਇਆ ਬਟ ਗਿਆਨ ਦੀ ਕਪ ਹੋ ਜਾਂਦਾ ਹੈ ਗਿਆਨ ਗਿਆਨ ਅਜਨ ਗੁਰਦਿਆ ਅ ਅਗੇ ਆਂ ਤਾਜ਼ਾ ਉਹਨੇ ਰਾਜ਼ੂਰ ਕਰਵਾਇਆ ਇਹਨੇ ਮਾਲਾਮੇ ਗਿਆਨ ਤਰਪ ਜਨ ਜਨ ਭਲੇ ਖੈਦੂਰ ਕਰ ਭਲੇ ਖਾ ਗਿਆ ਭਲੇ ਖਾਦਾ ਪਾਇਆ ਮਾਇਆ ਦਾ ਭਲੇ ਖਾ ਵੀ ਤਾਂ ਮਾਇਆ ਦੀ ਪਾਇਆ ਝੂਠ ਲਈ ਪਾਇਆ ਲੋਹੇ ਨੂੰ ਲੋਹੇ ਕੱਟਦਾ ਹੁੰਦਾ ਸੋਹਣੇ ਆ ਸੋਨਾ ਦੀ ਚਾਣੀ ਨਾਲ ਲੋਹ ਦੀ ਘਟਿਆ ਜਾਂਦਾ ਇਸ ਕਰਕੇ ਗਿਆਨਤਾ ਜਨ ਹਲੇ ਲੱਗਦੀ ਹੈ ਅ ਗਿਆਨਤਾ ਇਹਨਾਂ ਦੂਰ ਹੋ ਗਈ ਵੀ ਜੋ ਅਸੀਂ ਜਿੱਤ ਨੂੰ ਜਾ ਰਹੇ ਹਾਂ ਕਿ ਇਹ ਰਸਤਾ ਠੀਕ ਹੈ ਮਾਇਆ ਦਾ ਰਸਤਾ ਕੀ ਠੀਕ ਹੈ ਮਾਇਆ ਦਾ ਰਸਤਾ ਹੀ ਅਜ ਦੂਰ ਨਾ ਫੜਿਆ ਹੋਇਆ ਵਿਨਾਸ਼ ਦਾ ਰਸਤਾ ਮਾਇਆ ਦਾ ਰਸਤਾ ਵਰਮਾਣੀਆਂ ਇਸੇ ਨੂੰ ਇਹ ਰਾਜ ਛਡਾਉਂਦੀ ਹੈ ਜੋ ਅੱਜ ਰਸਤਾ ਮੁਸਪੀਡਿਸ਼ਨ ਅੱਡੇ ਰਸਤਾ ਇਹ ਹੀ ਰਸਤਾ ਚਲਾ ਰਿਹਾ ਹੈ ਕੁਰਬਾਨ ਇਹ ਬਿਨਾਜ ਦਾ ਰਸਤਾ ਸਾਡੀ ਦੁਨੀਆ ਦੇ ਰੋ ਦੇਖ ਲੋ ਕਿੰਨੇ ਆਦਮੀ ਮਰਦੇ ਨੇ ਕਿਤੇ ਸਪੋਟ ਉੱਤੇ ਆਦਮੀ ਆਜੂ ਲਵਾ ਰਹੇ ਕਿਤੇ ਡਾਊਨ ਹੋਪਨੇ ਨੇ ਕਿਤੇ ਬੰਬ ਬੰਬ ਰੋਜ਼ ਖਬਰਾਂ ਆਉਂਦੀਆਂ ਨੇ ਇਸ ਗੋ ਬਹੁਤ ਬੜੀ ਅਸ਼ਾਂਤੀ ਹੈ ਅਰੇ ਵੀ ਚੰਤਾ ਹੈ ਵੀ ਜੈ ਦੂਏ ਬਿਨਾਜ ਅਡਾਵਗਾ ਫਤਿਹਾਰ ਅਤਵਾਗਿਆਂ ਦਾ ਤਵਾਗੇ ਬਿਲਟਾਂ ਚਲਾ ਦੇਣਗੇ ਉਹ ਜਿਹਨੂੰ ਆਪਣਾ ਹੀ ਨਹੀਂ ਹੈ ਪਰਵਾਹ ਆਪਣੀ ਜ਼ਿੰਦਗੀ ਦੀ ਉਹਨੂੰ ਤੂੰ ਇਹ ਨਹੀਂ ਕੀ ਪਰਵਾਹ ਤੇ ਵੀ ਚਿੰਤਾ ਉੱਤੇ ਫਸ ਗਏ ਕਿੱਥੇ ਰਾਹੇ ਕੋਈ ਨਹੀਂ ਉਹਨੂੰ ਬੁੱਧੀ ਨਹੀਂ ਕੰਮ ਕਰਦੀ ਸਾਰੇ ਦੇ ਪ੍ਰੈਸ਼ਨ ਚਾਲੂ ਹੋਰ ਫੌਜਾਂ ਚਲਣੋਂ ਸਾਰੇ ਜਿਹੜੇ ਉੱਪਰ ਹਨ ਨਾ ਜਿਹੜੇ ਹਾਲ ਹਾਲ ਦਾ ਫੌਜੀ ਕਰਨ ਨਾ ਜਿਹੜੇ ਮੱਦਨ ਇਹ ਵੀ ਜਾਣ ਦੇ ਤਪਰੈਸ ਜੇਹੀ ਆਗਰ ਦ ਪ੍ਰੈਸ਼ਨ ਸਾਰੇ ਕੇ ਲਗਾਂਗੇ ਤੇ ਪ੍ਰੈਸ਼ਨ ਕੋ ਬਸਣਗੇ ਜਿਹਦੇ ਗਿਆਨ ਨੂੰ ਜਲ ਲਾਂਗੇ ਛੋਟ ਪ੍ਰੈਸ਼ਨ ਤੋਂ ਬਸਣਗੇ ਬੱਜਣਾ ਹੀ ਕਿ ਸਾਨੂੰ ਨੀਹਾ ਕੜਾ ਤਾਂ ਉਹੀ ਬੈਠਣਗੇ ਤਾਂ ਇਹਨਾਂ ਨੇ ਕਹਾ ਧਰਮ ਵਿਚਾਰ ਟੜਾ ਦਾ ਰਾਜ ਹੈ ਪ੍ਰੈਸ਼ਨ ਦਾ ਰਾਜ ਹੈ ਗਿਆਨ ਅੰਧਿਆਨ ਗੁਰਦਿਆ ਗਿਆਨਾਂ ਦੇ ਬਿਨਾਸ ਜਿਹੜੀ ਅਗਿਆਨਤਾ ਜਾ ਰਹੀ ਹੈ ਨਾ ਅਗਿਆਨਤਾ ਦੀ ਦੌੜ ਜਾ ਰਹੀ ਹੈ ਸਾਰੇ ਜਦ ਨਾਲ ਜਰੇ ਦੇ ਨੇ ਦੇ ਦਾ ਨਾਸ਼ ਨਹੀਂ ਹੁੰਦਾ ਉਹ ਨਾਲ ਚਾਹੇ ਦੌੜ ਹਟੇ ਨਾ ਦੁਨੀਆ ਦਾ ਕੋਈ ਰੌਲਾ ਹੋ ਨਾ ਸ਼ਾਂਤੀ ਹੋਵੇ ਅ ਗਿਆਨ ਅੰਦਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ万 ਪ੍ਰਗਾਸ ਹਰ ਕਿਰਪਾ ਤੇ ਸਤਿ ਭੇਟੇ ਕਿਰਪਾ ਕਿਹਦੀ ਹੋਈ ਹਰ ਹੋਈ ਕੋਲ ਬ੍ਰਹਮ ਦੀ ਕਿਰਪਾ ਹੋਈ ਪਰਮੇਸ਼ਰ ਦੀ ਹੋ ਕਰਪਾ ਹੋਈ ਸਤਿ ਕਿਹਨਾਂ ਤੇ ਅੰਤਰਾਤਮਾ ਦੀ ਆਵਾਜ਼ੇ ਬੈਠੀ ਆ ਹੋਰ ਫੇਟਿਆ ਸ਼ਾਂਤੀ ਦੇਣ ਵਾਲਾ ਜਿਹੜਾ ਸੰਤ ਦਾ ਸ਼ਬਦ ਹੈ ਜਿਹਦੇ ਨਾਲ ਸ਼ਾਂਤੀ ਮਿਲੇ ਲੜਾ ਉਹ ਸ਼ਬਦ ਹੈ ਉਹ ਸੰਤ ਸ਼ਬਦ ਦੇਹੀ ਹੁੰਦੀ ਹੈ ਜੋਤੀ ਦੇਹੀ ਕੀ ਹੈ ਸ਼ਬਦ ਤੇ ਕੀ ਹੈ ਸ਼ਬਦ ਜੋ ਅੰਤਰਾਤਮਾ ਦੀ ਆਵਾਜ਼ ਹੈ ਸੰਤ ਦਾ ਪਰਮੇਸ਼ਰ ਦੀ ਕਰ ਪਾਉ ਹੋਏ ਤਾਂ ਉਹ ਅੰਤਰਾ ਆਤਮਾ ਦੀ ਆਵਾਜ਼ ਨਾਲ ਤਾਲਮੇਲ ਹੋਇਆ ਉਹਨੂੰ ਵੱਢਣ ਲੱਗਿਆ ਸੰਤ ਬਿਟਿਆ ਨਾਨਕ ਮਾਨ ਪ੍ਰਗਾਸ ਨਾਨਕ ਮਾਨ ਪ੍ਰਗਾਸ ਕਹਿੰਦੇ ਫੇਰ ਪ੍ਰਗਾਸ ਹੋਇਆ ਫੇਰ ਪ੍ਰਗਾਸ ਹੋਇਆ ਅੰਦਰ ਜਾਗਰੂਨ ਹੋਇਆ ਵੀ ਕਿਹੜੇ ਜਿਹੜੇ ਰਾ ਤੁਰੇ ਜਾਂਦੇ ਅੱਗੇ ਤਾਂ ਬਹੁਤ ਹੈ ਇਹਦਾ ਰਾਹ ਹੈ ਬੁੱਧੀ ਦਾ ਬਨਾਸ਼ ਹੈ ਇੱਥੇ ਇਹਦਾ ਅਕਲ ਦਾ ਬਨਾਸ਼ ਹੋ ਜਾਂਦਾ ਸਾਡਾ ਤਨ ਬੁੱਢਾ ਕਲ ਪੈਦਾ ਕਰਨਾ ਆਇਆ ਹੈ ਆਦਮੀ ਦੀ ਆਦਮੀ ਅਕਲ ਵਾਲਾ ਹੈ ਸਾਰੇ ਜਹਨੂਨ ਇਹਦੀ ਅਕਲ ਘਟੌੜੀ ਸੀ ਕ ਬਧੌੜੀ ਸੀ ਸ਼ੈਤਾਨ ਦੀ ਅਕਲ ਦੋ ਕਿਸਮ ਦੀ ਦੋ ਬੰਤੇ ਹੋਵੇ ਸ਼ੈਤਾਨ ਨੇ ਆਪਣੀ ਅਕਲ ਵਧਾ ਲਈ ਇਨਸਾਨ ਦੀ ਅਕਲ ਦੀ ਵਧੀ ਜਿਹੜੀ ਤੁਹਾਡੇ ਅਕਲ ਹੈ ਸਾਇੰਤਿਕ ਹੋ ਜਾ ਸ਼ੈਤਾਨ ਦੀ ਅਕਲ ਹੈ शैतान तगड़ा हो गया इंसान कमजोर हो गया अंदर मुद्दाला इंसान कमजोर है शैतान तगड़ा इंसान वाली अकल है नहीं शैतान वाली अकल बहुत है ये और है संसार जी जदों शैतान ज्यादा अक्ल वाला हो जाए इंसान डर जाता है इंसान टेप्रेचर चला इंसान, इंसान ने इंसानियत आली ज्यादा कर काम ना करे वे डिप्रेशन चले जाता है शैतान ने इनका कुमत हो गया शैतान ने अपने, अपने, अपने रू. रू. आप नु खतरा पैदा कर लिया दुए नु जेड़ा दुए नु कैना दुए नु आप नु खाता तैयार है जेड़ा दुए नु शोवा पटिया नु ਜਦੋਂ ਸ਼ੈਤਾਨ ਜਿਆਦਾ ਗਜ਼ਬੂਤ ਹੋ ਜਵੇ, ਅਕਲਾਰਾ ਹੋ ਜਵੇ, ਲੋਭਾਵੀ ਹੋ ਜਵੇ, ਮੋਹਾਵੀ ਹੋ ਜਵੇ, ਕ੍ਰੋਧਾਵੀ ਹੋ ਜਵੇ, ਹੰਮੇ ਹਾਵੀ ਹੋ ਜਵੇ, ਐਸੀ ਈਸ਼ੂ ਬਣ ਲੱਗ ਜਾਏ, ਸਭ ਗਿਆ ਮਰ ਗਿਆ। ਹੋ ਗਿਆ ਬੰਦ। ਇਹੀ ਹੋਇਆ ਹੋਇਆ ਸੰਸਾਰ। ਬੇਤੋਕ ਬਨਾਸ਼ੇ ਬਨਾਸ਼ੇ ਇਸ ਸੈਕਟਰ ਦੇ ਵਿੱਚ ਵੀ ਸ਼ਾਂਤੀ ਨਹੀਂ ਕੋਈ ਹੱਲ ਨਹੀਂ ਦੁਨੀਆਂ ਦਾ ਵਿੱਚ ਇੱਕ ਰਿਸ਼ਤਾ ਧਰਮ ਦਾ ਬਾਕੀ ਰਿਸ਼ਤੇ ਸਾਡੇ ਹੱਦਮਾਸ ਤੇ ਨੇ ਇੱਕ ਰਿਸ਼ਤਾ ਧਰਮ ਦਾ ਬਾਕੀ ਹੱਦਮਾਸ ਤੇ ਨੇ ਸਭ ਉਪਤਕਾਰ ਇਸ ਦਾ ਹੱਦਮਾਸ ਦਾ ਔਰ ਮਾਂ ਪਿਓ ਦਾ ਰਿਸ਼ਤਾ आत्मों का रिश्ता आत्मों का तहे पर पति पत्नी का रिश्ता आत्मों का रिश्ता है ये आत्मों का कबूतर जरूरी चल रहा ही नहीं वो तरबूज का रिश्ता है पति का रिश्ता है जो इथे भी आके क्रैक हो जाए इथे ही झगड़ा हो जाए रिश्ते में समझो बनाओ सबसे ज्यादा खतरनाक स्टेज है ਇਹ ਇਸ ਦਾ ਜਿਆਦਾ ਖਰਾਬ ਹੋ ਗਿਆ ਵਰਦੋ ਦੋਹਰੋਂ ਵਿਸ਼ਵਾਸ ਨਹੀਂ ਇੱਥੇ ਵੀ ਜੇ ਵਿਸ਼ਵਾਸ ਨਾ ਹੋਏ ਇਹਦਾ ਆਪਣਾ ਧਰਮ ਤੇ ਵਿਸ਼ਵਾਸ ਨਹੀਂ ਦੇ ਵਿੱਚ ਛੁੱਟ ਕੇ ਸਲੂਗੀ ਧਰਮ ਤੇ ਵਿਸ਼ਵਾਸ ਨਹੀਂ ਵਿਸ਼ਵਾਸ ਦੌੜਣ ਵਾਲਾ ਹੀ ਕੋਈ ਨਹੀਂ ਵਿਸ਼ਵਾਸ ਦੌੜਣ ਵਾਲਿਆਂ ਨੂੰ ਵਿਸ਼ਵਾਸ ਨਹੀਂ ਧਰਮ ਤੇ ਸਾਫ਼ ਹੈ ਤੁਹ ਪਤਾ ਲੱਗ ਹਰੇਕ ਆਦਮੀ ਧਰਮ ਚੋਂ ਹੌਲਦਾ ਜਨਮ ਲੈ ਕੇ ਬੱਚੇ ਧਰਮ ਚੋਂ ਆਉਣਗੇ ਜੇ ਉਹਨਾਂ ਦਾ ਆਪਸ ਵਿੱਚ ਹੀ ਵਿਸ਼ਵਾਸ ਨਹੀਂ ਹੈ ਤਾਂ ਬਤੇ ਤਾਂ ਉਹਨਾਂ ਦਾ ਆਪਸ ਵਿੱਚ ਜਿਹੜਾ પતિ-ਪਤਨੀ ਦਾ ਰਿਸ਼ਤਾ ਠੀਕ ਨਹੀਂ ਰਹਿ ਸਕਦਾ ਜੋ ਲੋਰਡ ਜਾਣ ਜਿੰਨੇ ਮਰਜੀ ਕਾਨੂੰਨ ਬਣਾ ਤਾਂ ਸ਼ੈਤਾਨ ਦੇ ਨੇ ਜਿਹੜੇ ਬਣਾਏ ਨੇ ਜਿੰਨਾ ਕਾਨੂੰਨ ਉਹਨਾਂ ਸ਼ੈਤਾਨ ਦੇ ਨੇ ਸੰਸਾਰ ਦਾ ਕੋਈ ਕਾਨੂੰਨ ਨਹੀਂ ਹੈ ਇਨਸਾਨ ਦਾ ਕਾਨੂੰਨ ਆਹਾ ਗੁਰਬਾਣੀ ਸ਼ੈਤਾਨ ਦਾ ਕਾਨੂੰਨ ਦੂਏ ਭਰੋਸਾ ਇਹ ਭਰੋਸੇ ਆ ਬਿਨਾਂ ਬਰੋਸਾ ਦੇ। ਉਹ ਤੇ ਸਿਆਸਤ ਤੋਂ ਸਵਾਰਥ ਇਹ ਤੇ ਪਰਮਾਰਥ ਜਿਨ੍ਹਾਂ ਅger ਪਰਮਾਰਥ ਦੀ ਪੜਾਈ ਨਹੀਂ ਪੜਾਈ ਜਾਂਦੀ ਵਿਸ਼ਵਾਸ ਕਿਸੇ ਦਾ ਕਰਦਾ ਹੀ ਨਹੀਂ। ਤਸੰ ਪਾਜਾ ਨੇ ਬਰੋਧੀਆਂ ਦੇ ਭਰੋਸਾ ਕਰ ਲਿਆ ਧੋਖਾ ਖਾ ਲਿਆ। ਵਾਰ-ਵਾਰ ਧੋਖਾ ਖਾਦਾ ਧੋਖਾ ਭਗਤਾਂ ਨੇ ਖਾਦਾ ਤੇ ਤਾੜੀ ਕਿਸਨ। ਪਰ ਮਾਰ ਖਾਲਾ ਧੋਖਾ ਖਾ ਸਕਦਾ ਦੁੱਧਾ ਨਹੀਂ ਦਿੰਦਾ ਇਥੇ ਧੋਖਾ ਦੁੱਧ ਦੇ ਹੀ ਦਿੰਦੇ ਨੇ ਖਾਂਦੇ ਨਹੀਂ ਰਾਸ਼ਟਰਪਤੀ ਰਾਸ਼ਟਰਪਤੀਆਂ ਕੋ ਜਾਣਦੇ ਨੇ ਗੱਲ ਕਰਦੇ ਨੇ ਆਪਣੇ ਆਪਣੇ ਦੋਤੇ ਰੱਖੇ ਤੇ ਤਾਂ ਦੋਤੇ ਹੀ ਲੜਾਈ ਹੋਵੇ আর ਘੌੜੀ ਲੜਾਈ ਹੋਵੇ ਤੇ ਸ਼ਾਂਤੀ ਕਿਵੇਂ ਹੋ ਜਾਈ? ਕੋਈ ਨਹੀਂ ਚੱਲਦੀ ਸ਼ੈਤਾਨ ਨੇ ਪੜਾਈ ਹੈ ਸਾਰੀ ਸ਼ੈਤਾਨ ਸਵਾਰਾ ਸਾਰਿਆਂ ਦੇ ਸੱਤੇ शैतान बहुत बहुत लग जाता होता शैतान ਦਾ ਕੀ ਕੰਮ ਬਣਾਦਾ ਨਾ ਹਾਂਜੀ ਗਿਆਨ ਅੰਜਨ ਗੁਰਦੀਆ ਅ ਗਿਆਨ ਅંધੇ ਰਬਨਾਸ ਫਰ ਕਿਰਪਾ ਤੇ ਸੰਤ ਭੇਟਿਆ ਇਹ ਅ ਗਿਆਨਤਾ ਅ ਗਿਆਨਤਾ ਕਿੱਥੋਂ ਪਤਾ ਲੱਗੇ ਵੀ ਅਸੀਂ ਗਲਤ ਪਾਸੇ ਨੂੰ ਜਾ ਰਹੇ ਹਾਂ ਕੌਣ ਦੱਸੇ ਜੋ ਕੁਝ ਕਰ दुई तर जल जदे जाऊंगा जद के जांगे जादे बसंत जंगल जा रहे हां जित तक छेरें छेर ने जानपर ने जब बटे जावड़ा कर जांगे चार बसंत फिर तो कोई लाजे तो पहला ही मान लो भाई इधर हो जायो ओतो मनन जब उणा दी गल वापस आ जावे तो ता दसरे ये गुरबानी वेदरती है, है कहां ਜੇ ਲੋ ਮੰਨ ਲੋ ਮੁੜ ਜੂਗਾ ਨਹੀਂ ਤਾਂ ਬਰੇ ਜਾ ਕੇ ਕਿਉਂ ਨਹੀਂ ਹੈ ਕਰੂਏ ਤੇ ਵਿਸ਼ਵਾਸ ਕਰਾਂਜ ਕਿਉਂ ਨਹੀਂ ਹੈ ਵਿਸ਼ਵਾਸ タルਬੋ ਦੀ ਪੜਾਈ ਖਤਮ タルਬ ਵਿੱਚ ਵੀ ਸ਼ੈਤਾਨ ਆਵੜਿਆ タルਬ ਚ タルਬ ਦਾ ਤੇ タルਬ ਤੇ ਸ਼ੈਤਾਨ ਨੇ ਕਬਜ਼ਾ ਕਰ ਲਿਆ ਜਦ ਅਸੀਂ ਪ੍ਰਵੋਚਨ ਦਾ ਨਾਟਕ ਕਰਦੇ ਹਾਂ ਉਦੇ ਵਿੱਚ ਗੱਲ ਕੀਤੀ ਹੋਈ ਹੈ ਸਪਸ਼ਟ ਇਹਦਾ ਪੜਾਈਓ ਹੱਟ ਕੇ ਪੜਾਉਣ ਤੇ ਪਤਾ ਲੱਗਿਆ ਸੀ ਆਈ.ਡੀ ਹੋਈ ਬਵੇਕ ਇੱਕ ਬਵੇਕ ਰਾਜਾ ਬਵੇਕ ਆਪਣੀ ਫੌਜਾਂ ਨੇ ਉਹਦੀ ਆਪਣੀ ਲੜਾਈ ਲੜ ਰਿਹਾ ਹੈ ਬਵੇਕ ਸੱਚਖੰਡ ਦੇ ਵਿੱਚ ਖਾਲਸਾ ਉਕੀਆ ਜਬ ਚੇਤਾ ਦਰਦ ਤਰ੍ਹਾਂ ਤੋਂ ਦੀ ਆਵਾਜ਼ ਆਏ ਇਹ ਬੇਵੇਕ ਦੀ ਆਵਾਜ਼ ਹੈ ਕਈ ਕਬੀਰ ਮੈਂ ਐਸਾ ਗੁਰ ਪਾਇਓ ਜਾਤਾਂ ਨਾ ਇਹ ਬਵੇਕਾ ਗੁਰ ਜਿਹੜਾ ਬੋਲਦਾ ਹੈ ਇਹ ਹੀ ਹੈ ਹਾਂ ਇਹ ਸੰਤ ਇਹ ਤਾਂ ਬਵੇਕ ਹੈ ਇੱਕ ਪਾਸੇ ਬਵੇਕ ਹੈ ਇੱਕ ਪਾਸੇ ਅਬਵੇਕ ਹੈ ਉਹੀ ਅਬਵੇਕ ਉਹ 10 ਗ੍ਰੰਥਾਂ ਵਿੱਚ ਜੋਰਾ ਪ੍ਰਮੋਦ ਚੰਦਰ ਨਾੜ ਕਾਸ਼ੀ ਵਾਲੇ ਨੇ ਲਿਖੇ ਉਹਨਾਂ ਨੇ ਮਹਾ ਮੋ ਇੱਕ ਪਾਸੇ ਬਾਹਮੋ ਖੜਾ ਕੀਤਾ ਇੱਕ ਪਾਸੇ ਗਿਆਨ ਚਲੋ ਗਿਆਨ ਆ ਗਿਆ ਨਾ ਇੱਥੇ ਇੱਕ ਪਾਸੇ ਗਿਆਨ ਖੜਾ ਕਰ ਲਿਆ ਗਿਆਨ ਚੰਗੇ ਪਾਸੇ ਨੂੰ ਜ਼ਿਆਦਾ ਰਿਹਾ ਇੱਕ ਪਾਸੇ ਮੋਹ ਖੜਾ ਕਰ ਲਿਆ ਸੰਸਾਰ ਦਾ ਮੋਹ ਹੈ ਸਾਨੂੰ ਇਹ ਬੁਰੇ ਬਸ ਉੱਡ ਜਾ ਰਿਹਾ ਹੈ ਗੋਇ ਦੋ ਢੋਲੇ ਬਣਾ ਲਏ ਉਹਨਾਂ ਨੇ। ਗਿਆਨ ਨੇ ਤੀਰਸ ਬਣਾਤੇ। ਕੱਲ ਤੀਰਥਾਂ ਤੇ ਸਟਾਰਟ ਕੀਤੀ ਸੀ। ਗਿਆਨ ਨੇ ਬਣਾਏ ਤੀਰ ਤੋਂ। ਟੂਪ ਬਣਾਏ। ਵੀ ਪਾਈ ਸਾਰੇ ਬੰਦੇ ਤੀਰਥਾਂ ਤੇ ਆਓ ਬੈਠੋ। ਜਿਹੜੇ ਲੁਕੇ ਸੇ ਬੈਨੇ ਉਹ ਵੀ ਆ ਜਾਣਗੇ। ਕਿਤੇ ਜਿਹੜਾ ਉਹ ਰੋੜਾ ਉਹ ਬੰਦੇ ਇਕੱਠੇ ਹੋ ਕੇ ਸਾਰੀਆਂ ਬਤਾਂ ਨੇ ਆਪਾਂ ਨੂੰ ਡੜਕ ਕੇ ਬਲੋਕ ਕੇ ਸਾਰੇ ਡਿਸਕਸ ਕਰਕੇ ਇੱਕ ਧਰਮ ਬਣਾਈਏ ਵਧੀਆ। ਤੀਰ ਦਾ ਵਾਜਿਤਾਂ ਜਿਹੜਾ ਤੀਰ ਜਦ ਬਣੇ ਨੇ ਜੋ ਤੀਰਪਰਾਂ ਤੀਰ થઈਦੀ ਸੀ ਜਦ ਬੜੇ ਨੇ ਕਿਉਂ ਬੜੇ ਸੀ ਤੀਰ ਤੋਂ ਪਰਮੋਚਨ ਦਾ ਨਾਟਕ ਪੜ੍ਹਣ ਜੀ ਨੂੰ ਲੱਗਦਾ ਵੀ ਇਹ ਪਤਾ ਨਹੀਂ ਕਿੱਥੋਂ ਬੋਲੀ ਜਾਂਦਾ ਬੁਲਾਸੇਵਾਲਾ ਕੋਈ ਕੁਝ ਕਹਿਣਾ ਹੋਣਾ ਵਿਦਵਾਨ ਇਹ ਦੁਆਦੀਗਾ ਤੇ ਵਿਦਵਾਨ ਇਹਨਾਂ ਨੇ ਕਿਹੜਾ ਪੜ੍ਹਿਆ ਕੁਝ ਜਿਹੜੇ ਕਹਿੰਦੇ ਹੋਣਾ ਵੀ ਕਿੱਥੋਂ ਬੋਲਦਾ ਪਰਮੋਚਨ ਦਾ ਨਾਟਕ ਪੜ੍ਹਣ ਉਹ ਔਰ ਉਹ ਪੜ੍ਹੇ ਬਿਨਾ ਕੋਈ ਧਰਮ ਧਰਮ ਵਾਲੇ ਖੇਤਕ ਐਂਟਰੀ ਹੋ ਨਹੀਂ ਹੁੰਦੇ ਬਿਲਕੁਲ ਰਾਜाराम ਦੀਆਂ ਕਹਾਣੀਆਂ ਦੇ ਵਿੱਚ ਉਹ ਮਤਮਰਦ ਅੰਦਰ ਪੰਜ ਸਾਲ ਜਮੈਂ ਉਹਦਾ ਬੜਾ-ਬੜਾ ਪਤਾ ਲੱਗਣ ਲੱਗਿਆ ਸੀ ਲਗਾਤਾਰ ਪੜ੍ਹਦੇ ਫਿਰਦੇ ਇਹ ਕਹਿਦਾ ਸੀ ਤੀਰਥ ਬਣਾਏ ਇਸ ਕਰਕੇ ਬਣਾਏ ਤੇ ਭਾਈ ਇੱਥੇ ਦੱਸ ਰਿਹਾ ਤੁਹਾਨੂੰ ਦੇ ਘਰ ਬਣਾਉਣਾ ਆਪਾਂ ਦੀ ਵਧੀਆ ਸਾਰਿਆਂ ਦੇ ਇਕੱਠੇ ਹੋ ਕੇ ਤੇ ਇਹ ਖਬਰ ਜਦ ਗਈ ਨਾ ਸ਼ੈਤਾਨ ਦੇ ਘਰ ਉਹ ਦੇਖ ਕੋਲ ਜਾਂ ਮਹਾਮੋਹ ਉਹ ਜਿਹੜਾ ਦੂਏ ਪਾਸੇ ਵਾਲਾ ਰਾਜਾ ਵਿਰੋਧੀ ਉਹਦਾ ਨਾਮ ਕੁਛ ਰੱਖ ਲੋ ਹੈਦਾ ਵਿਰੋਧੀ ਰਾਜਾ ਉਹਦੇ ਕੋਲ ਸੀਆਈਡੀ ਗਈ ਉਹਨਾਂ ਦੀ ਵੀ ਸਵਾਲ ਲੱਗੀ ਹੋਈ ਆ ਜੋ ਆਇਆ ਖਬਰ ਲੈ ਕੇ ਕਹਿੰਦਾ ਵੀ ਕੀ ਖਬਰ ਲੈ ਆ? ਸਾਡੇ ਖਬਰ ਬਹੁਤ ਬੁਰੀ ਹੈ। ਇਹ ਤੇ ਹੋ ਗਿਆ ਕਹਿੰਦਾ ਬਸ ਪੁੱਛੋ ਹੀ ਨਾ ਵੇ। ਹੁਣ ਆਪਾਂ ਨਾ ਸੌਣ ਨੂੰ ਤਿਆਰ ਹੈ। ਹੁਣ ਆਪਾਂ ਕੀ ਕਰਦੇ? ਅੰਨੇ ਗੱਲ ਤਾਂ ਦੱਸ। ਸਾਡੇ ਨਾਲ ਇਹ ਆ ਉਹਨਾਂ ਨੇ ਪਲਾਨ ਇਹ ਬਣਾ ਲਿਆ ਵੀ ਪੀਰ ਤੁਮ ਲਾਓ। ਪੀਰਾਂ ਨਾਲ ਗਿਆਨ ਦੋ ਸਾਰਿਆਂ ਨੂੰ ਗਿਆਨ ਪੜ੍ਹਾਓ ਤੇ ਡਿਸਕਸ ਕਰਿਆ ਕਰੋ ਗਿਆਨ ਬੰਦ ਇਕੱਠੇ ਹੋ ਕੇ ਕੋਈ ਰਾ ਗੱਡੀ। ਕੁਰਦਸੋ ਪਹਿਲਾ ਇਲਾਜ ਕੀ ਕਰ ਉਹਨਾਂ ਦਾ ਚਾਲ ਹੈ ਛਤਰਾੰਦੀਆ ਚਾਲਾ ਨੇ ਦੋ ਸਾਰੇ ਫਿਕਰ ਸਪੈਗੇ ਵੀ ਫਲ ਤਾਂ ਕੋਈ ਇਲਾਜ ਇਹ ਦੀ ਆਪਣੇ ਕੋਈ ਨਾ ਜੇਲਾ ਰਾਜਾ ਸੀ ਮਹਾਭੋ ਮੰਤਰੀ ਸੀ ਸਿਆਣੇ ਉਹਨਾਂ ਨੇ ਫਿਰ ਸਲਾਹ ਕੀਤੀ ਉਹ ਬਾਕਿਆ ਨੇ ਕੀ ਕਰ ਕਿ ਸਿਆਣੇ ਨੇ ਸਲਾਹ ਕਰਤਾ ਉਹ ਕਹਿੰਦੇ ਵੀ ਉਹ ਜਿਹੜਾ ਆਪਣਾ ਦਬ ਹੈ ਪਖੰਡ ਇੱਕ ਉਹਨਾਂ ਦੇ ਦੰਬ ਸੀ ਉਹਦਾ ਨਾਮ ਬੱਦੇ ਦਾ ਦੰਬ ਸੀ ਜਿਹਦੇ ਦੰਬ ਨੇ ਉਹ ਹੀ ਐਕਸਪਰਟ ਸੀ ਦੰਬਾ ਕਾਇਕ ਉਹ ਦੰਬ ਕਰਿਆ ਮਨਬੂਰ ਕ ਦੰਬ ਕਰਿਆ ਆਪਣੀ ਪਤ ਹੈ ਡੱਬ ਗਿਆ ਹੋਇਆ ਡੱਬ ਗਿਆ ਦੰਬ ਕਹਿੰਦੇ ਹਿੰਦੀ ਚ ਪਖੰਡ ਕਨਵੇਂ ਉਭਰਾਉ ਜੋੜੀ ਲੋੜ ਪਈ ਉਹ ਬੰਦਾ ਵੇ ਤਨ ਲੈਂਦਾ ਕਤਈ ਦਰਵਾਜ਼ੇ ਬੁਲਾਇਆ ਹੁਣ ਬੈਠੋ ਮੈਨੂੰ ਤਾਂ ਹੁੰਦਾ ਨਹੀਂ ਕੋਈ ਕੰਡਾ ਸਮਝਦਾ ਕੋਈ ਬਲਾਉਂਸਾ ਜਿਹਾ ਜਾਂ ਤਾਂ ਉਹਨੂੰ ਸਰਕਾਰੀ ਬੁਦਾਜੋ ਪਰ ਮੈਨੂੰ ਤਾਂ ਜਦ ਤੁਹਾਡੀ ਵੀ ਨਹੀਂ ਹੈ ਕਿਥੇ ਸਦੇ ਪਤਾ ਉਹਨੂੰ ਬਿਜਾਇ ਨੂੰ ਕੀ ਪਤਾ ਬੁਲਾਇਆ ਹੈ ਉਹ ਬਰਾਸੀ ਮੋੜਾ ਬਹੁਤ ਕਰਦਾ ਦਿਖਾਇਆ ਉੱਥੇ ਵੇ ਮੈਂ ਕੇ ਬੁਲਾਇਆ ਹੁਕਮ ਤਾਂ ਤੇਰੀ ਭਾਈ ਲੋੜ ਹੈ ਬੇਰੀ ਲੋੜ ਬੇਰੇ ਵਰਗ ਨਲਾਇਕ ਆਦਮੀ ਦੀ ਲੋੜ ਹੈ ਬੇਡੂਰ ਕੀ ਜਾਈਦਾ ਮੇਰਾ ਜੀਵਨ ਸੰਭਾਲੋਗੇ ਮੈਂ ਤੁਹਾਡਾ ਖਾਦਾ ਬਹੁਤ ਤੁਸੀਂ ਦਿੱਤਾ ਕੁਝ ਨਹੀਂ ਦਿੱਤਾ ਮੈਨਾਂ ਕਹਿੰਦਾ ਮੈਂ ਤੁਹਾਡੇ ਕੰਮ ਨਹੀਂ ਹੁੜ ਆਹਦੀਆਂ ਚੀਜ਼ਾਂ ਵੀ ਸਰਕਾਰਾਂ ਰੱਖਦੀਆਂ ਨੇ ਜਿਵੇਂ ਘੋੜੇ ਵਾਲੇ ਹੁੰਦੇ ਸੋਹਣੀਆਂ 'ਚ ਖਰਚਾ ਹੈਗਾ ਘੋੜਿਆਂ ਦੀ ਕਿਹੜਾ ਰੋਲ ਲੜਾਈ ਹੁੰਦੀ ਰੋਗਤ ਅੱਗ ਦਿਨ ਉੱਡ ਪੈ ਜਾਂਦੀ ਹੈ ਕਿਸੇ ਵਕਤ ਕੱਢ ਲਿਆ ਕਹਿੰਦੇ ਦੱਸੋ ਹੁਕਮ ਕਰੋ ਕੱਢ ਭਾਈ ਬੈ ਜਾ ਬੈ ਕੇ ਕੱਢ ਆ ਖਬਰ ਆਈ ਹੈ ਕਿ ਜਾਨ ਰੌਆ ਜਿਹੜਾ ਗਿਆਨ ਰੌਆ ਉਸੇ ਗਿਆਨ ਰੌਖਿਆ ਨਾ ਗਿਆਨ ਦਾ ਜਾ ਗਿਆਨ ਰੌਜ ਜਦ ਸਿਰਕੇ ਆ ਜਾ ਤਾਂ ਗੋਭ ਕਰੀ ਚਾਹ। ਗੱਲ ਇਹਦੇ ਕੋਈ ਬਬੂਲੀ ਆਦਮੀ ਦਾ ਲਿਖਿਆ ਹੋਇਆ। ਪਰ ਕੀ ਗੜਬੜ ਕਿੱਥੇ ਕੀਤੀ ਏ ਥੋੜੀ ਜਿਹੀ ਉਹਨੇ ਨਹੀਂ ਕੀਤੀ ਏ ਉਹ ਲਵਲੀ ਸੀ। ਸਾਡੇ ਪ੍ਰਮੋਹ ਚੰਦਰ ਨਾਟਕ ਨਾਲ ਉਹਨੇ ਗੜਬੜ ਕਿੱਥੇ ਕੀਤੀ ਉਹ ਲਵਲੀ ਸੀ। ਪਰ ਜੇ ਉਸ ਨਾਲ ਜਲਦੀ ਬਹੁਤ ਹੀ ਮੁਸ਼ਕਲ। ਬਈ ਸਾਡੇ ਕੋਲ ਕੋਈ ਜੇ ਗਿਆਨ ਪੈਦਾ ਹੋ ਗਿਆ ਸਾਡੇ ਕੋਲ ਕੋਈ ਲਾਜ ਨਹੀਂ सारे ਹਥਿਆਰ ਛੱਡ ਗਏ ਕਿ ਗਿਆਨ ਤਾਂ ਮੁਕਾਬਲਾ ਨਹੀਂ ਕਰ ਸਕਦੇ ਜਿੱਦਾਂ ਗਿਆਨ ਪ੍ਰਗਟਦਾ ਹੈ ਸੱਲ ਦੀ ਬੋਲਤੀ ਬੰਦ ਹੋ ਜਾਂਦੀ ਹੈ ਬੜੇ ਬੜੇ ਜਿਹੜੇ ਸੈਨਾਪਤੀ ਦੇ ਸਾਰੇ ਹਥਿਆਰ ਛੱਡ ਗਏ ਕੰਨਾਂ ਤੇ ਗੱਲੇ ਹੀ ਕੁਝ ਨਹੀਂ ਐ ਤੂੰ ਦੇ ਕੋਈ ਬੜਾ ਕੰਮ ਦੱਸੋ ਮੈਨੂੰ ਛੋਟਾ ਜਿਹਾ ਕੰਮ ਦੱਸੇ ਉਹ ਕਹਿੰਦਾ ਬਾਪਾ ਤੂੰ ਇਹ ਛੋਟਾ ਜਿਹਾ ਕਰਦੇ ਰੱਬ ਦਾ ਹੀ ਬਾਸਤਾ ਸਾਧਰੂਏ ਪਹਾੜਾ ਤੂੰ ਕਹਿੰਦਾ ਗੱਲੇ ਕੁਝ ਨਹੀਂ ਐ ਕਹਿੰਦਾ ਲ ਮੈਂ ਆਪਣਾ ਏਜੰਟ ਭੇਜ ਦਿੰਦਾ ਨਾ ਸਾਰੇ ਸਾਰੇ ਹੀ ਡੇਰੇ ਦੰਬਣੇ ਬਣਾ ਲੈ ਤੀਰਥਾਂ ਤੇ ਜਾ ਕੇ ਪਕੜ ਤੂੰ ਇਹ ਧਾਰ ਕੇ ਧਰਮ ਦਾ ਵਿੱਚ ਜਾ ਬੜਿਆ ਪਕੜ ਉਹ ਕਹਿੰਦੇ ਅੱਜ ਜਿੰਨਾ ਪਖੰਡਵਾਦ ਆਦਾ ਉਹਦੋਂ ਲਾਇਆ ਹੋਇਆ ਹੈ। ਕੀ ਗੁਜ਼ਾਰੇ ਕੀ ਮਤਲਬ ਹੈ? ਕੀ ਗੁਜ਼ਾਰੇ ਕੀ ਮਤਲਬ? ਹੁਣ ਇਹ ਜਵਾਬ ਦੇਣ ਉਹ ਪ੍ਰਬੋਹ ਚੰਨਲ ਨਾਲ ਅੱਜ ਚੱਲਿਆ ਹੋਇਆ ਹੈ 100 ਸਾਲ, 150 ਸਾਲ ਪਹਿਲਾਂ ਦਾ। ਉਹ ਅੱਜ ਸਾਹਮਣੇ ਹੈ ਕਿ ਨਹੀਂ ਹੈ? ਇਹ ਤਾਂ ਲਿਖਿਆ ਹੀ ਹੋਇਆ ਉਹ ਆਪਣੀ ਕਲਾਮਾਤ ਪੂਰੀ ਦਿਖਾਈ ਐ ਦੰਬ ਦੇ ਗਿਆਨ ਤੋ ਖਾ ਵਿਚ ਜ਼ਗ ਚਲਣ ਦਤੋ ਨੇ ਪਰ ਗਿਆਨ ਹੋ ਰਾ ਬੁਬੇਕ ਉਹਨਾਂ ਨੇ ਗਿਆਨ ਰੱਖਿਆ ਸੀ ਕਾਸ਼ੀ ਵਾਲਿਆਂ ਨੇ ਗਿਆਨ ਤੇ ਤੋ ਹਵੀ ਸੀ ਪਰ ਬੁਬੇਕ ਤੇ ਹਵੀ ਨਹੀਂ ਹੈ ਜਦ ਕਬੀਰ ਦਾ ਬੁਬੇਕ ਆਇਆ ਕਾਇ ਗਵੀਰ ਮੈਂ ਐਸੋ ਗੁਰ ਪਾਇਓ ਕਿਉਂਕਿ ਹਰ ਬਬੇ ਕੋ ਗਿਆਨ ਉੱਥੇ ਲਿਖਿਆ ਹੋਇਆ ਸੀ ਆਪਣਾ ਦੇ ਨਾਟਕ ਵਿੱਚ ਗਿਆਨ ਸੀ ਇਹ ਨਾ ਬਵੇਕ ਮੇਰੇ ਕੋਲ ਬਵੇਕਾ ਗਿਆਨ ਨਹੀਂ ਹੈ ਇਹਦੇ ਨਾਲ ਉਹ ਦੰਬ ਕਿਹੜਾ ਲਿਆਉਂਦੇ ਭਾਵੇਂ ਦੰਬ ਆਲੇ ਭਗਾ ਭਗਾ ਮਾਰੇ ਗੁਰ ਬਾਣੀ ਨੇ ਦੰਬ ਆਲੇ ਜਦ ਮਾਰ ਮਚੀ ਦਸਪਾ ਕੇ ਗਏ ਜਦ ਮਾਰ ਮਚੀ ਦੁਲੋਰ ਤੇ ਜਦ ਜੰਗ ਸ਼ੁਰੂ ਹੋਗੀ ਤਾਂ ਬਵੇਕ ਦੀ ਹੈ ਦੰਬ ਦੀ ਇਹ ਪਹਾਣ ਵਾਲਾ ਨੇ ਜਦੋਂ ਜਦੋਂ ਮਾਰਮਚੀ ਦੰਗੌਰ ਤੇ ਨਾ ਰਹੋ ਪਰ ਉਹ ਸੂਰਨ ਦੇ ਮਨ ਮੈਂ ਬੜੇ ਬੜੇ ਸੂਰਨ ਦੇ ਜਿਹੜੇ ਕਹਿੰਦੇ ਅਸੀਂ ਸਹੀ ਗਿਆਨ ਚੱਲ ਨਹੀਂ ਜੜੋ ਸਭਾ ਸਹੀ ਤਾਂ ਚੱਲ ਰਿਹਾ ਨਹੀਂ ਉਹਨਾਂ ਦੇ ਸਾਰਿਆਂ ਦੇ ਵਿਮਾਨ ਦੂਰ ਕਰਕੇ ਖਾੜੇ ਤੋਂ ਬਾਹਰ ਮਾਰੇ ਚੱਲ ਗਏ ਨਾ ਰਹਿ ਪਰ ਉਹ ਜਦੋਂ ਉਹਦੇ ਮੁੱਦਾ ਪਰਮ ਦੂਰ ਹੋ ਗਿਆ ਵੀ ਦਈ ਰੋਕ ਸਕਦੇ ਅਸੀਂ ਹਰੇ ਭਖੰਡਵਾਦੀ ਰੋਕੀ ਖੜੇ ਤੇ ਧਰਮ ਨੂੰ ਮੂਰੇ ਰੋੜਾ ਬਣੇ ਸਾਰਿਆਂ ਦੇ ਉੱਪਰ ਬਦੂਦ ਹੋ ਗਏ ਉੱਤੇ ਦੀ ਰੋਗ ਗਿਆ ਫਨ ਪਿੱਛੋਂ ਪਾਣੀ ਆਇਆ ਹਵਾਲੀਆ ਦੇ ਉੱਤੇ ਦੀ ਸਾਰਿਆਂ ਦੇ ਉੱਤੇ ਹੀ ਹੋ ਰੂਗੇ ਦੱਸ ਕਿਹਾ ਨਾ ਬੜੇ ਬੜੇ ਚੰ ਮੈਂ ਗਾ ਕੋਟੀ ਦੇ ਚਲਾਏ ਤੇ ਰਣ ਗੁੱਸਾ ਖਾਏ ਕੇ ਉਹ ਕੈਸੀ ਪਕੜ ਪਿਛਾੜੀਆਂ ਨਾ ਕੈਸਾ ਤੇ ਫੜ ਕੇ ਪਿਛਾੜ ਕੇ ਮਾਰੇ ਤੇਸਾਂ ਤੇ ਕੰਮ ਪਿਛਾੜੇ ਜਟਾਣਾ ਸੀ ਜਿਸ ਤਾਰ ਹੂੰ ਜਟਾਣਾ ਨਾ ਦਾਲਦਾਂ ਉਹ ਤੇ ਫੜ ਕੇ ਮਾਰੇ ਚੱਕੇ ਬਾਦ ਲੈ ਜੋ ਕੇਸ ਆਪਣੇ ਕਰ ਲਓ ਉਹ ਕੇਸੀ ਪਕੜ ਪਿਛਾੜੀਆਂ ਜਿਹੜੇ ਕੇਸ ਵੀ ਰੱਖਦੇ ਨੇ ਵੀ ਅਸੀਂ ਪਗਲ ਧਰਮ ਹੋ ਗਏ ਧਰਮ ਨਹੀਂ ਹੈ ਕੇਸੀ ਪਕੜ ਪਿਛਾੜੀਆਂ ਕਾਇ ਕੋਟੀ ਦਾ ਇਹ ਚਲਾਇਆ ਫੜਕੇ ਕਰੋੜਾਂ ਵੀ ਪਰੇ ਮਾਰੇ ਚੱਲੇ ਖੜੇ ਜੇ ਬਾਹਰ ਮਾਰੇ ਜੰਗ ਦੇ میدان ਦੇ ਬਾਹਰ ਕਰਦੇ ਕਾਇ ਕੋਟੀ ਦਾ ਇਹ ਚਲਾਇ ਤੇ ਰਣਕਾਲੀ ਰੁਸਾ ਖਾਏ ਤੇ ਇਹ ਤਾਂ ਆ ਜਿਹੜਾ ਦੁਨਿਆਵੀ ਗਿਆਨ ਹੈ ਇਹੀ ਦੂਰ ਮਾਰਦਾ ਭੰਡੂ ਭੰਡੂ ਇਹ ਤਾਂ ਦੁਨਿਆਵੀ ਗਿਆਨ ਤਰਜੀਹ ਨਹੀਂ ਹਟਦਾ ਉਹ ਤਾਂ ਕਾਲੀ ਗੱਲ ਆਈ ਹੈ ਬੇਵਕ ਨਹੀਂ ਲੜਿਆ ਹੈ ਚੰਡੀ ਦੀ ਗੱਲ ਨਹੀਂ ਆਈ ਉਹ ਤਾਂ ਨੇ ਉਹ ਆ ਕੇ ਬਾਹਰ ਮਾਰੇ ਖੜੇ ਇਹ ਹੈ ਕਿ ਧਰਮ ਦੀ ਹਿਸਤਰੀ ਗਿਆਨ ਕੀ ਹੁੰਦਾ ਧਰਮ ਦੇ ਵਿੱਚ ਗਿਆਨ ਦੇ ਬਿਨਾ ਗੱਲ ਦੀ ਵਧੇ ਹੁੰਦੀ ਹੈ ਸਾਜੀ ਸਰ ਕਰਪਾ ਦੇ ਸੰਗ ਭੇਟਿਆ ਗਿਆਨ ਹੁਰਦੀਆ ਗਿਆਨ ਅੰਜਨ ਜਿਹਾ ਦਿੱਤਨੀ ਜਾ ਕੇ ਨੇਤਰੀ ਪੜਿਆ ਜਿਹਦੇ ਅੱਖਾਂ ਵਿੱਚ ਪੈ ਗਿਆਨ ਅੰਜਨ ਉਹਦੀ ਅੰਦਰਲੀ ਹਕ ਗੁੱਲਦੀ ਆ ਦਲੀ ਬੰਦਾ ਵਾਲੀ ਜਿਹਨੀ ਅੰਦਰ ਲਿਆ ਕਿਉਂ ਲੋੜ ਹੈ ਜਾਂਦੇ ਜਲਦੀ ਅੱਖੀ ਸੂਤਕ ਵੇਖਣਾ ਉਹਨੂੰ ਸੂਤਕ ਲੱਗਿਆ ਹੈ ਬਿਮਾਰ ਹੈ ਅੱਖ ਜਾਣ ਅੰਜਨ ਨਾਲੇ ਅੱਖ ਖੁੱਲਣੀ ਹੈ ਉਹ ਅੱਖ ਖੁੱਲੀ ਬਿਨਾ ਅੰਦਰ ਨਾਨਕ ਮਾਨ ਫਰਗਾਸ ਜਾਣ ਅੰਜਨ ਗੁਰਦੀਆ ਅਗਿਆਨਾਂ ਦੇਰ ਬਿਨਾਗ ਅਗਿਆਨਤਾ ਦਾ ਹਨੇਰਾ ਦੂਰ ਕੀਤਾ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਨ ਕੋਰ ਗਿਆਨ ਤੇ ਬਿਰੰਦੇਰਾ ਇਹ ਗਿਆਨ ਦੀ ਗੱਲ ਆ ਗਿਆਨ ਦਾ ਪ੍ਰਕਾਸ਼ ਹੁੰਦਾ ਪ੍ਰਕਾਸ਼ ਦੀ ਉੱਤੇ ਪ੍ਰਕਾਸ਼ ਐਸਾ ਕਨੂਦੀ ਦਾ ਪ੍ਰਕਾਸ਼ ਅੰਦਰੀ ਅੱਖੂਦੀ ਦਾ